ਜੋ ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਇਹਦੇ ਚੋ ਮੁਕਤੀ ਹੋਣੀ ਡੈਫੀਨੇਟ ਹੈ ਇਹਦੇ ਚੋ ਆਤਮ ਦੇ ਦਰਸ਼ਨ ਹੋ ਜਾਣਾ ਡੈਫੀਨੇਟ ਹੈ ਪਰ ਜੇ ਕੋਈ ਕਦੇ ਚਿੱਤ ਲਾਏ ਚਿੱਤ ਲਾ ਕੇ ਕਰੇ ਤਾਂ ਇਹ ਚਿੱਤ ਲਾ ਕੇ ਇੱਕ ਵਾਰ ਕਿਤੇ ਹੋ ਕੇ ਕੋਈ ਨੂੰ ਬਚਾਈ ਨਹੀਂ ਉਹ ਜੇ ਅੱਜ ਕੱਲ ਹੋ ਰਿਹਾ ਹੈ ਕਰਦੇ ਆ ਰਹੇ ਨੇ ਸਾਰੀ ਸਾਰੀ ਜ਼ਿੰਦਗੀ ਲੁੱਨੀ ਮੁਸਕੀਤ ਵਰਗਾ ਨਹੀਂ ਜਿੰਨੀ ਲੁੱਨੀ ਪਤਾ ਨਹੀਂ ਲੱਗਿਆ ਕੁਰਬਾਨੀ ਕੀ ਕਹਿੰਦੀ ਹੈ ਨਹੀਂ ਹੋ ਸਕਦੀ ਉਹ ਪਤਾ ਹੀ ਨਹੀਂ ਆ ਵੀ ਵਾ ਗੁਰਬਾਣੀ ਗੁਰਬਾਣੀ ਕਰਨਾ ਹਮ ਜਪਦਾ ਗੁਰਬਾਣੀ ਕਰਕੇ ਬੜੇ ਬੜੇ ਜਿਲੇ ਇੱਕ ਵਾਰ ਦੇ ਚਿੱਤ ਹੋ ਕੇ ਗੁਰਬਾਣੀ ਦੀ ਵਿਚਾਰੀ ਤੇ ਸਫਲਤਾ ਵੀ ਨਹੀਂ ਮਣੀ ਉਹਨੇ ਆਪmane ਵੀ ਮੇਰਾ ਨਾਮ ਤਾਂ ਰੱਖਦੀ ਆ ਆਇਆ ਤੇ ਗੁਰਬਾਣੀ ਦਾਸ ਪੂਰਾ ਸਾਰਾ ਕਬਰੀ ਕੀਤਾ ਇੱਕ ਵਾਰ ਹੋ ਕੇ ਤੂੰ ਵਿਚਾਰਿਆ ਜੀ ਹੈ ਵਕਤ ਦੇ ਫਲ ਪਾਵਣ ਇਹ ਵਕਤ ਦੇ ਫਲ ਪ੍ਰਾਪਤ ਹੁੰਦਾ ਉਹ ਮੈਂ ਵਿੱਚੋਂ ਜਾਏ ਉਹ ਵੀ ਵਿੱਚੋਂ ਚਲੀ ਜਾਂਦੀ ਉਹ ਵੀ ਵਿੱਚੋਂ ਤਾਲ ਜਾਂਦੀ ਵੀ ਤਾਂ ਹੋ ਮੈਂ ਆਵਾ ਨਾਲ ਬਰੋਧ ਹੈ ਕਿ ਹੋ ਮੇਰੇ ਜਨਾਜ਼ੇ ਰਹੀ ਨਾ ਉਹ ਤੇ ਕਿੱਥੇ ਡੋਕਾ ਰਸ ਕੇ ਆ ਜੂ ਕੋਈ ਨਾ ਬਸ ਐਤ ਖਾਈ ਹੋਵੇਂ ਪਹਿਲਾਂ ਜਾਊਗੀ ਕਿ ਮੈਂ ਜਾਊਗੀ ਥੋਪ ਜਾਊਗੀ ਆ ਗੁਰਬਾਨੀ ਪੜਦੇ ਪੜਦੇ ਸੁਬੀਹ ਦੇ ਸਮੇਂ ਹੋਵੇ ਜਲੀ ਜਾਂਦੀ ਸੁਨਿਆ ਦੀ ਹਵਤ ਤੇਰੀ ਉਤਰ ਸੁਹੈਲ ਬਿਸਤੂ ਆਏ ਹੋਵੇ ਬਿਸਤੈਲੇ ਉਹ ਬਿਸਤੂ ਜਿਹੜੀ ਪਹਿਲੀ ਹੋਈ ਆ ਗੋਂਗਾ ਨਾਲ ਉੱਤਰ ਜਾਂਦੀ ਆ ਬਾਤ ਮੈਂਨੇ ਲੋਕ ਤਾਂ ਬਹੁਤ ਬਾਤ ਮਰਦਾ ਬਾਤ ਹੀ ਕਰਦਾ ਹੈ ਸਲਾ ਬੰਦੇ ਸੱਚਾ ਨਾ ਕੇ ਕੋਲ ਕੋ ਗੁਰਬਾਨੀ ਨੂੰ ਸੱਚ ਸੱਚ ਕਰਕੇ ਜਿਹਨਾਂ ਨੇ ਬੰਦੇ ਉਹਨਾਂ ਦੀ ਹੋਂਦ ਚਲੀ ਜਾਂਦੀ ਹੈ ਜੇ ਗੁਰਬਾਨੀ ਤੇ ਸ਼ੰਕਾ ਕਰਦਾ ਵੀ ਹੋਂਦ ਰਹੀ ਜਾਂਦੀ ਹੈ ਉਹ ਵੀ ਤਾਂ ਫੜੀ ਆ ਪੁਰੇ ਅੜੀ ਹੋਈ ਬੰਦਾ ਦੀ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖੀ ਵਸੇ ਮਨਿ ਆਈ ਬੰਧਨ ਤੋੜੇ ਉਹ ਜੀਵਨ ਦੀ ਸੇਵਾ ਕੀਤੀ ਹੈ ਸਵਰਥ ਵਿਚਾਰੋਂ ਮੇ ਗਏ ਨਾਨਕ ਉਹਗਣ ਬਦਲ ਕੀਨੇ ਨਾਨਕ ਉਹਗਣ ਜੇਤੜੇ ਤੇਤੇ ਗਲਿੰਦੀ ਜੀਰ ਸਾਰੇ ਉਹਗਣ ਟੁੱਟ ਗਏ ਅਗੁਣਾ ਸਾਡੀ ਹੋੜਦੇ ਨੇ ਬੰਦ ਨਾ ਅਗਰ ਛੁੱਟ ਗਿਆ ਲੋਭ ਛੁੱਟ ਗਿਆ ਮੋ ਛੁੱਟ ਗਿਆ ਅਸਰੋ ਛੁੱਟ ਗਿਆ ਮੈਂ ਛੁੱਟ ਗਈ ਹਉਕੂ ਛੁੱਟ ਗਿਆ ਬੰਧਨ ਤੋੜੇ ਮੁਕਤ ਹੋਏ ਫਿਰ ਮੁਕਤ ਦਾ ਫਿਰ ਮੁਕਤ ਅਗਰ ਆਖੀ ਮੁਕਤੀ ਬੋਲਣੀ ਹਰਗਾ ਤੋਂ ਬੋਲਣੀ ਸੱਚੇ ਰਹੇ ਸਮਾਏ ਸੱਚ ਸਮਾਏ ਰਹਿਣਾ ਸੱਚਾ ਕੌਣ ਹੈ ਸੱਚਾ ਅੰਤਰਾਦੂ ਕਿੱਤ ਸੱਚਾ ਹੈ ਉਹ ਸੱਚੇ ਚ ਸਮਾ ਜਾਂਦਾ ਮਨ ਫਿਰ ਪਹਿਲਾਂ ਮਰ ਝੂਠਾ ਜਾਂਦੇ ਹੋਇਆ ਹੈ ਜਦ ਦੀ ਡਿਜ਼ਾਇਰ ਤੇ ਅਹ ਹੈ ਝੂਠਾ ਜਦੋਂ ਇਹ ਛੱਡ ਦਿੰਦਾ ਉਹ ਗ੍ਰੰਥ ਨੂੰ ਫਿਰ ਸੱਚੇ ਚ ਸਮਾ ਜਾਂਦਾ ਇੱਕ ਹੋ ਜਾਂਦਾ ਇਸ ਜਗ ਗੁਰਮੁਖੀ ਵਸੈ ਮਨ ਇਹ ਜੇ ਦੇ ਵਿੱਚ ਅਲੱਗ ਚੀਜ਼ ਕੀ ਹੈ ਸਰ ਤੋਂ ਦੋ ਬਾਲਬ ਹੋਰ ਤੇ ਚੀਜ਼ ਜੋ ਬਾਲਬ ਨਹੀਂ ਗੁਰਦੀ ਗੁਰਬਾਲੀ ਨਹੀਂ ਗੁਰਦੀ ਵੱਡੇ ਦਾ ਵੱਡਾ ਰਤਪਾ ਬਾਸ਼ਾਈ ਦਾ ਉਹ ਨਾ ਲੱਭਣੀ ਗੋਬੀ। ਅਨੇਕਾਂ ਬਾਸ਼ਾ ਤੁਰੇ ਫਿਰਦੇ ਨੇ ਕਿਹਾ ਹੋ ਕੇ ਚਲੇ ਗਏ ਦੁਖੀ ਹੋ ਰਹੇ ਨੇ। ਜਹਾਂ ਦੁਖੀ ਸਭ ਸੰਸਾਰ ਸਾਰੇ ਸੰਸਾਰੇ ਦੁਖੀ। ਅਲੱਬ ਹੈ ਗੁਰੂ ਕੇ ਬਖਸ਼ਾਣਾ ਹੈ। ਗੁਰਮਾਨ ਹੈ ਉਹ ਬਖਸ਼ਿਆ ਕਿਸੇ ਬੇਵਕ ਬੁੱਧੀ ਆਲੇ ਦੇ ਕੋਲਤੀ ਕਿਵੇਂ ਮਾਰ ਕੇ ਬਖਰੀਆ ਦੀ ਬੇਕੁਤੀ ਹੋਵੇ ਬੇਕੁਤੀ ਆਏ ਗੁਰਜੀ ਪਖਾ ਲੈ ਇੱਕੋ ਹੀ ਗੱਲ ਹੈ ਦੋਨ ਦੇ ਨਾਨਕ ਜੋ ਗੁਰਸੇਵੈ ਆਪਣਾ ਹਾਂ ਤਿੰਨ ਬਲਹਾਰਾ ਜਾਉ ਆਹ ਤਰਾ ਜਿਨ੍ਹਾਂ ਨੇ ਲਿਆ ਜਿਨ੍ਹਾਂ ਨੇ ਹੁਣ ਗੁਰਬਾਣੀ ਨੂੰ ਸਤਗੁਰ ਮੰਨ ਲਿਆ ਗੁਰਬਾਣੀ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਇਹਦੇ ਮੰਨ ਲਿਆ ਉਹਨਾਂ ਦੇ ਕੰਨਾ ਮਾ ਗੁਰਬਾਣੀ ਉਸਤ ਮਲੇ ਆ ਆਪਣਾ ਜਿਹੜਾ ਸੀਤ ਗੁਰੂ ਮੰਨ ਲੀਏ ਗੁਰਦੇਵ ਮੰਨ ਲੀਏ ਉਹਦੀ ਗੱਲ ਤੇ ਭਰੋਸਾ ਕਰੀ ਜਾਂਦੇ। ਜੇ ਉਹਦੀ ਗੱਲ ਤੇ ਭਰੋਸਾ ਢੀਕੀਤ ਕਰਦੇ ਅਸੀਂ ਤਾਂ ਗੁਰਬਾਣੀ ਨੂੰ ਅਸੀਂ ਕਹਨੇ ਆ ਗੁਰੂ ਮੰਨਦੇ ਜੀ। ਵਧੀਆ ਤਾਂ ਬਾਣੀ ਭਰੋਸਾ ਕਰੀਏ। ਭਰੋਸਾ ਕਰਦਾ ਕੌਣ ਹੈ? ਰੌੜਾ ਪੁੱਤ ਨਾਨਕ ਜੋ ਗੁਰਸੇਵੇ ਆਪਣਾ ਹੌ ਤਿੰਨ ਬਲਹਾਰੇ ਜਾਉ। ਕੜੀ ਗੁਰਬਾਣੀ ਨਾਲੇ ਜੁੜਿਆ ਰਹੇ ਕਿਸੇ ਹੋਣਾ ਗੁਰਬਾਣੀ ਨੂੰ ਸਾਥ ਕੋਲ ਬੰਨ ਕੇ ਗੱਲ ਕਰੇ ਕਿਸੇ ਬੰਦੇ ਨਾਲਾ ਜੁੜ ਕੇ ਗੱਲ ਕਰੇ ਠੀਕ ਹੈ ਆਪਣਾ ਗੁਰ ਸੇਵਣਾ ਹੈ ਜੀ ਆਪਣਾ ਸੇਵਣਾ ਮੈਂ ਆਪਣਾ ਸੇਵਣਾ ਕੋਈ ਆਪਣਾ ਸੇਵ ਰਹੇ ਜਿਹੜਾ ਸਾਡੇ ਵਾਲੇ ਵੀ ਬਣਦੀ ਫਿਰ ਉਹ ਆਪਣੀ ਨੂੰ ਸੇਵਣੀ ਮਹੱਲਾ ਮਨਮੁਖ ਮਨ ਅਨ ਦੂਜੇ ਲੱਗੇ ਜਾਏ ਤਿਸ ਸੁਖ ਸੁਪਨੇ ਨਹੀਂ ਦੁੱਖ ਦਾ ਦੁੱਖ ਵਿਹਾਰ ਮਾਨਾ ਨਾ ਉਹ ਜਿੱਤਿਆ ਉਹ ਵੀ ਜਿੱਤਿਆ ਜਾਂਦਾ ਮਨਮੁਖ ਦਾ ਨਹੀਂ ਬਣ ਜਿੱਤਿਆ ਵੀ ਮੈਨੂੰ ਟਿੱਪੀ ਜ਼ਿਆਦਾ ਲੈ ਲੱਗਦੀ ਹੈ ਜੀ ਮਨ ਵਰਡ ਹੈ ਨਾ ਮਨ ਤਾਂ ਨਹੀਂ ਹੈ ਨਾ ਮਨ ਦੀ ਗੱਲ ਹੋ ਰਹੀ ਹੈ ਨਾ ਹਾਂਜੀ ਕਿੱਪੀ ਨਹੀਂ ਚਾਹੀਦੀ ਕਲ ਉਹਨਾਂ ਨੇ ਫਬਰਕ ਜੀ ਆਸਾ ਸਭ ਕੁਝ ਕੀ ਪੀਲਾ ਕਿ ਉਹਦਾ ਟੇਟ ਹਰਨ ਕੋ ਤਾਂ ਕੀ ਕੀ ਹਟਲੇ ਤਾਂ ਦਾ ਕੀ ਕੀ ਉਦੀ ਹੋਦੀ ਅਜਿੱਤ ਹੈ ਹਾਂਜੀ ਮਨਮੁਖ ਦਾ ਜਿਹੜਾ ਮਨ ਹੈ ਉਹ ਅਜਿੱਤ ਹੁੰਦਾ ਹੈ ਅਜਿੱਤ ਹੋ ਜਿੱਤੇ ਜੁਗ ਜੀਨਾਂ ਬੰਦੀਤ ਰਿਹਾ ਉਹਨਾਂ ਸੁਖਾਰ ਜਿੱਤ ਰਿਹਾ ਬੱਜੀ ਤੇ ਜੰਨ ਜੀ ਤੋਂ ਤਾਂ ਤੇ ਜੰਨ ਜਿੱਤ ਲੈ ਸਕਦਾ ਠੀਕ ਹੈ ਜੀ ਦੂਜੇ ਲੱਗੇ ਜਾ ਹਾਂ ਦੂਜੇ ਲੱਗਾ ਜਾਇਓ ਕਿਉਂਕਿ ਦੂਜੇ ਬਾਲੇ ਸ਼ਰੀਰ ਨਾਲ ਜੁੜਿਆ ਹੈ ਤ੍ਰਿਕੁਟੀ ਕਿਹਾ ਹੋ ਇਹ ਤ੍ਰਿਕੁਟੀ ਨੂੰ ਦੱਸਉਂਦਾ ਚਾਹੀ ਜਾਂਦਾ ਨਾ ਉਹਨਾਂ ਦਾ ਤਾਂ ਮਾਨਾ ਜਿੱਤਾ ਉਹਨਾਂ ਦਾ ਨੇ ਠੀਕ ਜੀ ਇਸ ਜਿੱਤਿਆ ਉਹਨੂੰ ਸੁਪਨਿਆਂ ਵੀ ਸੁਖ ਨਹੀਂ ਆ ਦੁੱਖਾਂ ਦੇ ਵਿੱਚ ਸਾਰੀ ਸੁੱਖੇ ਦੁੱਖਾਂ ਕੜ ਜਾਂਦੀ ਹੈ ਸਾਰੀ ਜਿੰਦਗੀ ਠੀਕ ਹੈ ਦੁੱਖੋ ਜੇ ਜਿੱਤ ਦੀ ਦੇਵ ਤੈਨਾਂ ਜਾਂ ਮੈਂ ਉਹਦਾ ਘਰ ਘਰ ਪੜ ਪੜ ਪੰਡਤ ਥੱਕੇ ਆਵਈ ਥੱਕੇ ਕਰਮ ਕਮਾਈ ਵਾ ਔਰ ਸਿੱਧ ਦੋਹੇ ਕਹੇ ਰਹੀਆਂ ਨੇ ਇੱਥੇ ਸੀਗੀ ਪੰਡਤ ਤਾਂ ਬਿਜਰੂ ਨਾਲ ਜੁੜਿਆ ਹੋਇਆ ਰਾਜੇ ਨਾਲ ਜੁੜਿਆ ਹੋਇਆ ਨਾਈਕ ਮੀਰ ਦਾ ਤੋਕ ਤੋ ਜਾ ਚੋ ਕੂਪਤ ਰਾਗੇ ਹਰ ਸੂਰ ਬੋਲ ਤੇ ਅਨੂ ਪੜਦਨੂ ਕਿ ਹੈ ਤੇ ਕਰਨਾ ਗਿਆ ਕਿੰਨਾ ਆਯਾਦ ਹੂੰ ਸਿੱਧ ਗਏ ਅਬ ਪੜ ਪੜ ਕੋਥੀਆਂ ਪੜ ਪੜ ਪਰਨ ਮਰੀ ਵੀ ਜਾਂਦੇ ਨੇ ਬੜੀ ਇਹ ਪ੍ਰਵਾਨੀ ਬੜੀ ਵੀ ਜਾਂਦੇ ਨਹੀਂ ਰੱਖਦੀ ਸਮਝ ਵੀ ਨਹੀਂ ਰੱਖਦੀ ਤੇ ਥੱਕੇ ਸਿੱਧ ਸਮਾਧੀ ਲਗਾਏ ਸਿੱਧ ਸਮਾਧੀ ਲਾ ਕੇ ਥੱਕ ਗਏ ਬਾਦੀ ਜਿੱਤ ਹੋਇਆ ਕਹਿੰਦਾ ਮਤਲਬ ਬਾਦੀ ਜਿੱਤ ਹੋਇਆ ਇਹਨਾਂ ਤੇ ਉੱਪਰ ਆ ਗਿਆ ਨਾ ਮਨ ਮੁਖਲੇ ਸਾਰੇ ਜਿੱਤ ਪੈਗੋ ਸਾਰੇ ਇਹਨਾਂ ਦਾ ਠੀਕ ਹੈ ਇਹ ਦੇ ਵੀ ਕਰਮ ਖਵਾਏ ਇਹ ਕਰਮ ਕਰਦੇ ਕਰਦੇ ਥੱਕ ਗਏ ਬੜੇ ਪਾ ਆ ਗਿਆ ਅਗਰ ਕਿਸੇ ਦੇ ਕੋਈ ਵੀ ਸਦਰੀ ਜਿਹੜੇ ਗੁੱਸੇ ਬਸ ਜਾਇਆ ਹੋਵੇ ਫਿਰ ਕੁੜੀ ਦੇ ਵਿੱਚ ਬਾਦੀ ਲਾ ਕੇ फेर तो कर थक के 68 तीर थनाए मन की सार ना जाननी हम में परम पुलाए पेखदारी और तीर थनाए 68 तीर थने रोदे थना के।, के थकले ਮਰਗੀਦਾਰ ਨਾਲ ਜਾਣੀ ਆ ਗੁਰ ਕੀ ਹੁੰਦਾ ਨੂੰ ਜਾਵੇ ਨਹੀਂ ਕਿਸੇ ਦੀਆਂ ਗੱਲੇ ਨਹੀਂ ਹਨ ਨੂੰ ਉੱਥੇ ਹੋ ਮੈਂ ਪਰਬਤ ਕੋ ਲਾਇ ਹੋ ਮੈਂ ਪਰਬਤ ਕੋ ਲੇ ਗਰੀ ਗੁਰ ਪ੍ਰਸਾਦੀ ਭਉ ਪਿਆ ਵਡਭਾਗੀ ਵਸਿਆ ਮਨਾਏ ਭੈ ਪਿਆ ਮਨ ਵਸ ਹੋਆ ਹਉਮੈ ਇਹ ਗਿਆਂ ਕਿ ਆਉਂ ਜੁਰੀਆਣਾ ਹੁਕਮ ਦਾ ਪਰਵੇਸ਼ ਦਾ ਧਿਆਨ ਹੋ ਗਿਆ। ਉਹਦੇ ਅੰਦਰ ਪਾਇਆ ਹੋਇਆ ਹੁਕਮ। ਜਮਣ ਵਾਲਾ ਹੁਕਮ ਹੈ। ਉਹਦੇ ਅੰਦਰ ਗੁਰਪ੍ਰਸਾਦੀ ਭੌ ਪਿਆ। ਭਾਉ ਜਿਹੜਾ ਮੈਂ ਭੌ ਵੀ ਪਾਇਆ ਹੈ। ਭਾਉ ਜਿਹੜਾ ਕੱਲੇ ਵਾਲਾ ਹੁੰਦਾ ਉਹਦੇ ਨਾਲ ਦਾ ਅਰਥ ਪਾਇਆ ਹੈ। ਜਿਹੜਾ ਵਿੱਚ ਚਲਣਾ ਲੰਗ ਰਿਹਾ ਦਾ ਸਾਬ ਕਿ ਜੀ ਉਹ ਪ੍ਰੇਮ ਹੈ ਹਾਂਜੀ। ਸੱਨੇ ਵਾਲੇ ਇਹ ਪਾਏ ਦਾ ਹਾਲਤ ਉਹੀ ਬਣਦਾ। ਠੀਕ ਹੈ ਜੀ। ਜਰੇ ਬਣਦਾ ਹਾਲਤ। ਦੀ ਜਲੂਗਾ ਵਾ ਨਹੀਂ ਚੱਲਦਾ। ਫਿਰ ਹੁਕਮ ਨੂੰ ਖੋਜਿਆ, ਬੁਝਿਆ, ਔਰ ਹੁਕਮ ਅਨਸਾਰ ਚੱਲਿਆ। ਠੀਕ ਹੈ ਜੀ। ਤੇ ਮਟੇ ਭਾਣਾ ਕਰਕੇ ਤਾਂ ਮੁਲਟਕਿਆ ਹੁਕਮ ਦੀ ਰਾਏ ਤੇ ਹੀ ਮੰਨਦੇ ਜੇ ਹੁਕਮ ਦੇ ਵਿੱਚ ਦੁਹਰੇ ਲਈ ਇੱਕ ਤਾਂ ਹੁਕਮ ਕੀਏ ਬਣਵਾਵ ਦੇ ਦੇ ਰਾਹ ਪੀੜੇ ਅੱਗੇ ਜਾਵਣਾ ਇੱਕ ਕਹਿੰਦਾ ਗੁਰਤੇ ਪਾਣੀ ਚੱਲਣਾ ਇੱਕ ਆਪਣੀ ਪਾਣੀ ਚੱਲਣਾ ਆਪਣੇ ਪਾਣੀ ਚੱਲਣਾ ਛੱਡੋ ਤਾਂ ਤਾਂ ਤੇ ਗਿਆ ਨਾ ਹੁਕਮ ਤੋ ਠੀਕ ਹੈ ਭੈ ਪਿਆ ਮਨ ਵਸ ਹੋਆ ਸ਼ਬਦ ਚ ਆ ਕਰਕੇ ਹੀ ਮਿਲਵਾਉਂਦਾ ਹਾਂ ਹੁਕਮ ਦੀ ਤਾਇ ਕਰਕੇ ਤਾਇਰ ਪਾਓ 1000 ਰੁਪਏ ਸਫਰ ਕੀਤੇ ਛੋਏ ਲੱਭ ਹਾਂ ਨਾ ਵਸੋ ਕੰਪਲੈਕਸ ਸ਼ਬਦ ਜੁੜਾ ਹੈ ਸ਼ਬਦ ਨੇ ਉਪਦੇਸ਼ ਨਾਲ ਹੁਕਮ ਜੁੜਦੀ ਦਾ ਉਦੇਸ਼ ਹੋਬੇ ਨੂੰ ਖਤਮ ਕਰ ਦਿੰਦੇ ਜਾਲ ਸੱਚ ਰਤੇ ਨਿਰਮਲੇ ਜੋਤੀ ਜੋਤ ਮਿਲਾਏ ਸਾਕੇ ਜੀ ਗਿਆਨ ਚੜ ਗਿਆ ਤੇ ਦਿਲ ਬੰਦੇ ਇਕੋ ਕੱਪੜੇ ਰੰਗ ਕਿੰਨੇ ਨਰਵਲੇ ਹੁੰਦੇ ਨਰਵਲੇ ਦੀ ਡੈਫੀਨੇਸ਼ਨ ਬਦਲਤੀ ਗਈ ਤੇ ਆਪੇ ਇਹ ਸਾਚੀਦਾਰਾਂ ਕਿ ਚਲੇ ਨਰਵਲੇ ਤੇ ਨਰਵਨਾਇ ਸਰਬੈਸੀ ਸਾਡੇ ਬਣੇ ਫਿਰਦੇ ਸੀ ਸਤ ਉਹ ਦਸਨ ਸਾਚੀਦਾਰ ਕਿ ਨੂੰ ਚਲੇ ਸਾਬਤ ਕਰਨ ਸਾਚੀਦਾਰਾਂ ਤਾਂ ਨਰਵਲੇ ਇਹਨਾਂ ਗੱਲਾਂ ਫਿਰਨ ਜੋਤੀ ਜੋਤ ਮਿਲ ਜੋਤੀ ਜੋਤ ਮਿਲਣੀ ਹੋਣੀ ਚਾਹੀਦੀ ਹੈ ਨਰਵਲੇ ਹੋਣ ਜਿਹੜੇ ਇੱਕ ਬੰਦੇ ਕਿਤਨਾ ਇੱਕ ਨਾ ਜਰ ਬੰਦੇ ਬਣਦੇ ਸੱਤ ਗੁਰ ਨਾਲ ਕੋਈ ਵੀ ਥੋਪੇ ਬੰਦੇ ਵਿੱਚੋਂ ਮੈਲਿਕ ਨਹੀਂ ਬਣਦੇ ਕਿਹੋ ਜਿਨਾ ਜਰ ਬੰਦੇ ਵਿੱਚ ਮੈਲ ਹੈ ਉਹ ਨਾ ਜਰ ਬੰਦ ਇੱਕ ਹੋਈ ਛੱਡ ਕੇ ਵਰਨਾ ਹੋਈ ਨਹੀਂ ਚੜਦਾ ਸਤ ਨਾਨਕ ਸੁਖ ਸਮਾਇਆ ਜਿਨਾ ਜਰ ਸੱਚ ਦਾ ਗਿਆਨ ਵੀ ਬਲਦਾ ਉਹਨਾਂ ਜਰ ਨਾਮ ਲਈ ਬਸ ਸਤਗੁਰ ਮਿਲਿਆ ਪਹਿਲਾਂ ਸੱਚ ਦਾ ਗਿਆਨ ਮਿਲੂਗਾ ਫਿਰ ਅਗੇ ਨਾਮ ਮਿਲੂਗਾ ਪਹਿਲਾਂ ਇੱਕ ਹੋਊਗਾ ਫਿਰ ਨਾਮ ਮਿਲੂਗਾ ਫਿਰ 부ਆ ਨਾ ਪਾਇਆ ਨਾਨਕ ਸੁੱਖ ਸਮਾਏ ਫਿਰ ਸੁੱਖ 사ਗਰ ਦੇ ਵਿੱਚ ਸਮਾ ਜਾਂਦਾ ਜਾਂਦਾ ਜਾਂਦਾ 사ਗਰ ਸਾਚੇ ਸੁੱਖ ਵਿੱਚ ਸਮਾ ਜਾਂਦਾ ਨਾਨਕ ਸੁੱਖ ਸੁਭਾਣੇ ਸੁੱਖ 사ਗਰ ਦੇ ਵਿੱਚ ਸਮਾਉਂਦਾ ਆਪਾ ਪਪ 사ਗਰ ਛੱਡ ਛੁੱਟ ਜਾਂਦਾ ਸੁੱਖ 사ਗਰ ਚਲੇ ਜਾਂਦਾ ਹਕੂਮਤ ਦੇ ਵਿੱਚ ਸਮਾ ਗਿਆ ਸੁੱਖ 사ਗਰ ਦੇ ਵਿੱਚ ਸਮਾ ਜਬਦ ਤੇ ਵੀ ਦੇ ਵੀ ਸਮਾਜ ਆਉਂਦੇ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੰਭ ਕਿੰਨ ਮੈਂ ਲਹਿ ਜਾਵਣਾ ਆ ਜਿਹੜੇ ਰਾਜੇ ਨੇ ਇਹਨਾਂ ਦਾ ਵੀ ਇਕਰਮ ਤੇ ਹੈ ਰਾਜਨੰਦ ਤੇ ਬਾਲ ਰੰਗ ਜਿਹੜੇ ਹੈ ਇਹ ਹੰਕਾਰ ਦਾ ਰੱਬ ਹੈ ਭੂਪਤੀ ਰਾਣੇ ਰਾਮ ਦੇ ਰੰਗ ਚਾਹ ਇਹ ਚਾਰ ਦੰਦਾਂ ਦਾ ਰੰਗ ਹੈ ਨਾ ਦੱਸੋ ਆ ਹੁਣ ਕਿੱਥਾ ਲੱਗਦਾ ਸਾਨੂੰ ਕਿੱਥਾ ਲੱਗਦਾ ਕਿਉਂ ਮੁਸਕਰਾਹਟੀਆਂ ਨੇ ਜਿੱਤ ਮਿਲਦੀ ਹੈ ਸੰਸਾਰੀ ਬਾਵਾ ਹੁੰਦੀ ਹੈ ਉਹ ਚਾਰ ਦੰਦਾਂ ਦਾ ਰੰਗ ਲੈ ਜਾਵਣਾ ਚਾਰ ਦੰਦ ਸੋਹਣਾ ਲੱਗਦਾ ਹੈ ਇਹ ਮਾਇਆ ਰੰਗ ਸੁਭ ਫਿਰ ਮੈਂ ਲੈ ਜਾਵਣਾ ਇਹ ਤਾਂ ਇੱਕ ਫੁੱਲ ਦੇ ਰੰਗ ਵਰਗਾ ਮਾਇਆ ਦਾ ਰੰਗ ਫੁੱਲ ਅਲੱਗ ਹੋਇਆ ਚੁੱਟਿਆ ਤੇ ਰੰਗ ਲੈ ਗਿਆ ਠੀਕ ਇਹ ਖੰਡ ਚ ਲੈ ਜਾਂਦਾ ਜੰਮ ਚਲਦਿਆਂ ਨਾਲ ਨਾ ਚੱਲੇ ਫਿਰ পাপ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਆਹ ਚਲਦਿਆਂ ਨਾਲ ਨਾ ਚੱਲੇ ਜੰਮ ਨਾਲ ਨਹੀਂ ਚੱਲਦਾ ਜਾਂਦੇ ਤੋਂ ਛੱਡ ਕੇ ਸਰੀਰ ਜਾਂਦਾ ਇੱਥੇ ਰਹਿ ਜਾਂਦਾ ਰਹਿੰਦੇ ਇਹ ਜਸ ਨਾਲ ਨਹੀਂ ਜਾਂਦਾ ਦਰਗਾਹ ਚ ساری ਜਸ ਦਰਗਹ ਦੇ ਰਹਿ ਜਾਂਦੇ ਇਹ ਜਿਹੜਾ ਰੰਦਾ ਨਾ ਜਿਹੜਾ ਰਸਾ ਕੁਰਸੀ ਦਾ ਇੱਥੇ ਹੀ ਰਹਿ ਜਾਂਦਾ ਖਿੱਚ ਕੇ ਲੈ ਜਾਂਦਾ ਜਾਂ ਗੱਦਲ ਤੇ ਘੋਟਾ ਦਿੰਦਾ ਨਾ ਜਾਂ ਲੈ ਜਾਂਦਾ ਰੱਬ ਸਾਹਿਬ ਚੱਲਦੇ ਨਾਲ ਨਾਲ ਚੱਲੇ ਸਿਰ ਪਾਪ ਲੈ ਜਾਂਦਾ ਲੈ ਕੇ ਕੀ ਜਾਂਦਾ ਪਾਪ ਪਾਪ ਲੈ ਜਾਂਦਾ ਨਾਲ ਕਿਤੇ ਉਹ ਤਾਂ ਨਾਲ ਜਾਂਦਾ ਉਹ ਛਾਤੀ ਤੇ ਗੋਸ਼ ਤਾਂ ਪਾਪਾਂ ਨਾਲ ਜਾਂਦਾ ਪਰ ਆ ਜਿਹੜੀ ਕੁਰਸੀ ਦਾ ਜਲਾ ਹੈ ਨਾ ਅਕੜੇ ਦੀ ਨਾਲ ਜਾਂਦਾ ਇਹ ਪਕੜ ਚ ਲਾਇਆ ਥਾਲ ਖਰਾ ਡਰਾਵਲ ਕਾਲ ਨੇ ਫੜ ਕੇ ਪੂਰੇ ਲਾ ਲਿਆ ਨਾ ਅੱਗੇ ਅੱਛੇ ਖਰਾ ਡਰਾਵਲ ਏ ਘਰ ਆਉਂਦੇ ਏ ਤਾਂ ਦਰਦਾ ਹੈ ਇੱਥੇ ਤਾਂ ਲੋਕਾਂ ਨੂੰ ਡਰਉਂਦਾ ਨਹੀਂ ਤੇ ਘਰ ਆਵਾਂ ਫਿਰ ਆਉਂਦੇ ਨੂੰ ਡਰ ਸੱਚਾ ਧਰ ਆਵਣਾ ਫਿਰ ਇਹਨੂੰ ਸੱਚਾ ਧਰ ਦਾ ਫੇਰ ਪਤਾ ਲੱਗਦਾ ਸੱਚਾ ਧਰ ਕੀ ਹੁੰਦਾ ਹੈ ਸੱਚ ਦਾ ਧਰ ਨਹੀਂ ਬੰਦਦਾ ਇਹ ਕੋਹ ਦਾ ਧਰ ਨਹੀਂ ਬੰਦਦਾ ਇਹ ਉਹਨਾਂ ਚ ਜਿੰਨਾ ਕਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਉਹ ਬੇੜਾ ਜਿਹੜਾ ਹੁਣ ਦਖਿਆ ਗੁਰਬਾਣੀ ਕਹਿ ਰਹੀ ਆ ਨਾ ਸਾਰਾ ਖੱਲਾ ਇਹ ਹੱਥ ਨਹੀਂ ਆਉਣਾ ਫੇ ਵੇਲਾ ਫਿਰ ਪਿਸਤੌਲਾ ਫਿਰ ਪਿਸਤੌਣ ਨਹੀਂ ਬਾਕੀ ਰਹਿ ਜਾਂਦਾ ਜਿਹੜਾ ਹੱਥ ਨੇ ਫਿਰ ਪਿਸਤੌਣ ਆ ਵੀ ਉਹ ਹੋ ਕੀ ਕੀਤਾ ਹੈ ਇਹ ਤਾਂ ਉਲਟਾ ਸਭ ਕਰ ਨੇ ਉਹ ਜਿਹੜਾ ਮੇਰਾ ਬੱਲੇ ਬੱਲੇ ਸੀ ਹੋਈ ਥੀ ਜੀ ਠੀਕ ਹੈ ਜੀ ਇੱਥੇ 6ਵੀਂ ਪੌੜੀ ਸਮਾਪਤੀ ਹੈ ਜੀ ਜੀ